ਮੈਨੂੰ ਸਾਡੇ ਰਾਜਸੈਂਦਰ ਸੰਦਸਨ ਦੇ 10 77 ਗੁਰੂ ਕਾਂਸ ਗੁਰੂ ਜੀ ਫਿਰ ਸਾਡੇ ਆਸਨ ਦਰਸ਼ਨ ਤੋਂ ਨਾ ਤੋਂ ਹੋ ਤਾਲੀ ਤੇ ਆਂਸਾ ਮੇਂ ਜੰਗੀ ਫਰਨੀ ਚਾਹ ਜਾਣੀ ਜੀ ਹਾਲੇ ਲੱਗਦਾ ਹੈ ਰੋਜ਼ ਮਗਰ ਸੂਤਰ ਕਰਦਾ ਜਾ ਜੀ ਰੋਮਾ ਦੁਨੀਆਂ ਤੋਂ ਕੋਈ ਸਰਬਾਗਨਾ ਬਿਠਾ ਕੇ ਸੱਗੇ ਪਾਰੇ ਜਾਣ ਜੀ ਤੇ ਹਾਲਤ ਹੋਣੀ ਦੂਰ ਦੇ ਰਾਸ ਕਸਾਉਂਦੇ ਗਏ ਸਾਰੇ ਲੋਕ ਜਾਨਾ ਤੋਂ ਸੋਚ ਜਿੰਨਿ ਭੱਲੇ ਵਾਹ ਵਾਹ ਆ ਮਾਜ ਖੋਲ ਕੇ ਕਰੀ ਕਹੀ ਪੱਠੇ ਖਾਵੇ ਉਹ ਜੁ ਖਾਵੇ ਕਰਦੇ ਆ ਵਾਹ ਵਾਹ ਤਾਨ ਗੁਰ ਜੀ ਆਖਣਾ ਨਾ ਪਾਇ ਕਥਿਆਇ ਸੋ ਦੇਖਾਇਆ ਤੇ ਦੁਦ ਮੈਂ ਤੀਆ ਵਾਹ ਵਾਹ ਵਾਹ ਵਾਹ ਹੈ ਵਾਹ ਵਾਹ ਤਨ ਉਹ ਗੱਲ ਨਹੀਂ ਦਾ ਮੈਂ ਖੋਦ ਦਰਸ਼ਨ ਕੀਤਾ ਕਿਤਨਾ ਬਸਰ ਹੋਲਾ ਸੀ ਜੀ ਸੰਤਾ ਸੀ ਮੈਂ ਦਰਸ਼ਨ ਕੀਤਾ ਜੀ ਸੋਤੇ ਬਾਗਾਂ ਬਾਗ ਦਾ ਜਿਹੜਾ ਸੰਤ ਰੂਸੇ ਮੇਰੀ ਸੁਦੇਸਾ ਆਉਣਾ ਹੋ ਮੈਨੂੰ ਆਕੰਧ ਦੇਖਾਂ ਤੇ ਮੇਧ ਜਾਏ ਦੁਆਏ ਨੇ ਚੱਲੋ ਉਹਨਾਂ ਦਾ ਦਰਸ਼ਨ ਕਰੀਏ ਜੀ ਸਾਗੇ ਸੋਈਦਾ ਫਾਇਦਾ ਰਾਮਕਲਿਆਣ ਮੇਲਾ ਸੀ ਤੁਮੂ ਲੱਗੇ ਪੂਜਾ ਪੂਜਾ ਸਾਨੂੰ ਜੀ ਇੱਕ ਤਬੂ ਕਮੇਰੇ ਦੇ ਦੇਖਦੇ ਪਾਵਾਂ ਜਾਗੇ ਚਰਨੀ ਅਥਲਾ ਸਤਿ ਸ੍ਰੀ ਅਕਾਲ ਗਦਾਈ ਜੀ ਖੰਤ ਟੋਲਾਏ ਆ ਸਿੱਧੋ ਕੇ ਬੈਠ ਜੀ ਸੈਸਾਸ ਅਗੋਤ ਸਾਦਰ ਪਰਮਕਾਰਿਓ ਬਗੈਰ ਦੇ ਜੀ ਦਾ ਫਰਾ ਕਰਦੇ ਜੀ ਸਤ ਉਹ ਦਰਸ਼ਨ ਦੇ ਜੀ ਸਤ ਗੁਰੂ ਸਾਹਾ ਸੰਗਤ ਗੁਰੂ ਮੋਤਬਲ ਜੀ ਦਾ ਪੜਾ ਕਾਟਣੇ ਨੇ ਸਤ ਅਨੁਸ਼ਾਸਨ ਹੈ ਨੇ ਜੀ ਚੋਰਾ ਕਰਕੇ ਜੀ ਸਭਾਂ ਚੁੱਪ ਕਰਦੇ ਜੀ ਸੰਤ ਮਰਜਾ ਜੀ ਬੋਲੇ ਜੀ ਜੀ ਹੇ ਜਰਾ ਨਾ ਬੈਠੋ ਰਾਹੀ ਜੀ ਆ ਗਏ ਹੋ ਤੇ ਔਰ ਲਾਏ ਵਾਹ ਚਲ ਸਾਜੀ ਵਾਰੀ ਦੀ ਆਉਣੀ ਹੈ ਵਾਹ ਵਾਹ ਆ ਗਏ ਚੋਰ ਲਾਏ ਤੁਸੀਂ ਬੈਠਾ ਬੈਠੇ ਹੋ ਗਏ ਆਪਕਾ ਕੰਮ ਕਾਸ਼ਤਾ ਰਾਜੀ ਨਹੀਂ ਜੀ ਮੱਤਾ ਤੋੜ ਤੋ ਰਾਜੀ ਨਹੀਂ ਜੀ ਨਾਮ ਦਾ ਸਾਦਾ ਚਾਹ ਚਾਦਾ ਲਗਾਉਂਦਾ ਵਾਹ ਵਾਹ ਵੇ ਹੋਏ ਮੈਂ ਤਾਂ ਹੈ ਕੇ ਆਖਿਆ ਨਾਮ ਦਾ ਸਵਾਦ ਚ ਸਾਦਾ ਚਾਹ ਦੇ ਤਾ ਚਾਦਾ ਲਗਾਉਂਦਾ ਜੇ ਅੰਗਾ ਸਾਰਾ ਜਵਾਬ ਦੇ ਸਕਿਆ ਕੱਤ ਮਾਈ ਕੀਤੀ ਕੱਤ ਫਿਰ ਮਤਲਬ ਆਪਣੀ ਬਲਦਾਂ ਮੈਂ ਜੱਸ ਹਾਲਾਂ ਸੰਸਾ ਮੇਜਿਆ ਨਹੀਂ ਨਾ ਪ੍ਰਲਾਖੇ ਚਪਾ ਜਪਨ ਕਰੀਏ ਇਹਦੇ ਜਤਨ ਦਾ ਜੀ ਸ਼ਾਇਦ ਸੋਚਿਆ ਬੜਾ ਮੈਂ ਕਦੀ ਅੰਦਰ ਸੁੱਤਾ 12 ਮਹੀਨੇ ਨਾ ਹਾ ਨਾ ਸਿਆ ਜੀ ਮੇਰੇ ਹਵਾ ਦੇ ਅੰਦਰ ਹੋ ਜਾਣਾ ਜੋ ਮਠਾਵੇ ਬੇ ਮੇਰਾ ਮਜੀਦਾਨੀ ਜੀ ਜੀ ਮੈਂ ਕਬਾਇਤ ਕੀ ਨੀਂਦ ਨਾ ਜਰਾ ਕੋ ਮਾਰੀਏ ਜੀ ਯਾਹ ਦਾ ਲੈ ਜੀ ਜੀ ਬੱਝਾਂ ਜਿੱਤੀ ਗਈ ਜੀ ਕੱਲ ਬੜਾ ਪਾਵੈ ਜੀ ਰਾਮਰੇ ਸੋਹਤੀ ਰਜ਼ਾਈ ਕਲਾਜੀ ਹੈ ਸੀ ਜੀ ਉਹ ਗਿਆ ਤਰ ਚੇ ਜੀ ਰਜ਼ਾਈ ਬੁਕਾ ਮਾਰ ਕੇ ਬੈ ਜਾ ਜੀ ਆਜ ਕਾ ਜਗਾ ਜਾ ਕੋ ਬਾਆ ਕਾ ਮੈਂ ਜਾ ਜਾਦਾ ਸੋਗੀ ਜਾਗਦਾ ਜੀ ਰਾਬਾ ਪਾਸੇ ਕੋ ਪਾਗਾ ਜੀ ਜਾਗਦਾ ਸਤ ਸਤ ਆਵਾਜ਼ ਆ ਮੈਂ ਜਾ ਸਕਦੀ ਸਤ ਜਿਵੇਂ ਲੋਰ ਲਗਾ ਮੈਂ ਲਾ ਲੈਣਾ ਗੁਰੂ ਨਾਨਕ ਨੇ ਕਿਹਾ ਨਾਮ ਜਪੀਏ ਤੇ ਜਨਨ ਸਵਾਲ ਇਹ ਮਾਰ ਮੈਂ ਸਤ ਦਾ ਨਾਮ ਲੈ ਕੇ ਚ ਬਹਿ ਗਿਆ ਜੀ ਅਦਾਸ ਕਾਸ ਬਹਿ ਗਿਆ ਜੀ ਪਾ ਲੋ ਤੇ ਮੀਨ ਕਿਥੇ ਆ ਹਾਂ ਕਾਹ ਦਾ ਹੱਥ ਲੰਗ ਗਈ ਜੀ ਸਮੀਰ ਘੜਵਾ ਦਵਰੀ ਫੜਿਆ ਦੂਜੀ ਰਾਤ ਆਈ ਤੇਰੋ ਸੋਚਾ ਨਾ ਜੀ ਆਈ ਜੀ ਆ ਚੋਕਾ ਲੰਗੀ ਜੀ ਨਾ ਨਹੀਂ ਗਈ ਜੀ ਰਲਾਈ ਦੇਟਾ ਨਹੀਂ ਪੜਨੀ ਜੀ ਕੋਈ ਨਹੀਂ ਬੋਕਰ ਚੌਥੀ ਰਾਤ ਆਈ ਜੀ ਫੋੜੀ ਲੰਗ ਗਈ ਵਸੇ ਵੀ ਰਾਤ ਆਈ ਜੀ ਫੋੜੀ ਗਈ ਵਸੇ ਤਰੀ ਵਾਹ ਵਾਹ 6 10 ਨੂੰ ਕੋਈ ਆਵਾਜ਼ ਜੀ ਤੋਟੇ ਕੋ ਸਾਥੇ ਸਾਥੇ ਕੋ ਲਾਲਪੁਰ ਕਦੀ ਦੇ ਦਰਸ਼ਨ ਦੇਦੇ ਸਾਰੇ ਜਾਣਦੇ ਸਨ ਸੰਤ ਸਾਧ ਜੀ ਬਜ਼ਾਰੇ ਸੰਤ ਮਿਲਤੇ ਸਿਹਾ ਨੂੰ ਸਿਜਿੰਦੇ ਆਲੇ ਜੀ ਸਾਰੇ ਉਸ ਅਮੀਰ ਅਤਲਾ ਸ਼ਾ ਪ੍ਰਸਨਾ ਕੀ ਆਲਿਸ਼ਾ ਜੀ ਇਹਦਾ ਜੀ ਸਹ ਸਾਦਾ ਇਹ ਤਾਂ ਸੁਣਿਆ ਕਦੇ ਛੜੀ ਹੁੰਨ ਜੀ ਜੀ ਹੁਕਮ ਕਰੋ ਜੀ ਮਪਾਸ ਐਂਡ ਰਾਕਟ ਉਹ ਵੀ ਆਵਾਜ਼ ਨਾਲ ਕਰੇ ਵਾਹ ਵਾਹ ਵਾਹ ਵਾਹ ਮਾਇਆ ਦਾ ਦਿਨ ਖਾਣਾ ਲੈ ਸੰਤੋ ਸੰਤ ਅੰਤਰਜਾਮੀ ਸੰਤ ਮਾਇਆ ਦਾ ਜਿਸੀ ਜੀ ਦਾ ਮਿਸਟਾਈ ਵਾਹ ਸੰਸਾਗ ਜਾਂਦਾ ਨਾ ਉਹ ਮੈਨੂੰ ਆ ਕੇ ਸ਼ਾਬਾ ਨਿਤਿਆ ਦਿੱਤਾ ਮੈਨੂੰ ਹੱਥ ਤੇ ਸੰਤਾ ਯਾਹਮੇ ਰਾਤ ਪਹਿਲੀ ਰਾਤ ਹੋਰ ਵੀ ਕਰੀ ਤੂੰ ਜਾਗਦਾ ਬਈ ਮੈਂ ਜੀ ਮੈਂ ਕਿਹਾ ਸੰਤ ਜਾਨ ਜੀ ਮੈਨੂੰ ਲਾਗਿਆ ਯਤਨ ਮੈਂ ਨੀਂਦ ਮੈਨੂੰ ਛੱਡੇ ਨੀਂ ਨਾ ਬੋਲੇ ਉਹ ਜੀ ਕਰ ਛੱਡਾ ਇਹ ਨਹੀਂ ਹੁਣ ਨੀਂਦ ਨਹੀਂ ਦੀ ਕੀ ਕਸਾਵਾ ਫੇਰ ਮੈਨੂੰ ਜਾਨੀ ਤੇ ਜਾਨੀ ਦਾ ਵਕਾਸੀ ਵਕਾਰ ਬੜੇ ਜੀ ਮੈਂ ਆ ਖਾਂਬੇ ਕੀ ਜੀ ਮੈਂ ਗਾਜ ਚੀਰੂ ਕਰ ਦਿੱਤੀ ਜੀ ਇੱਕ ਕਪਸਾਦਾ ਵਾੜਾ ਛਾਵਾ ਛੱਡਣਾ ਫਟੇ ਜਬਾਰ ਇਸ ਜੀ ਉਹ ਕਰਾ ਨੋ ਸ਼ਰ ਜੀ ਬਾਗ ਵੀ ਦੇਣਾ ਜੀ ਫਿਰ ਹਾਰ ਵੀ ਜੋਨੇ ਜੀ ਫਿਰ ਪੀਲੇ ਪਰ ਮਾਰ ਮਗਰ ਜਾਣਾ ਜੀ ਕਾਦੇ ਕੋਈ ਸਮਝ ਨਾ ਜਿਸ ਤਰੇ ਮੇਰੀ ਤੇ ਸੋ ਪ੍ਰਾਣੀ ਦੇ ਹੋਜਣਾ ਮਟਰਨਾ ਉਹ ਟੁਰਿਆ ਤੂੰ ਸਾਖ ਦੇ ਕਰ ਸਕਦਾ ਜਾਨ ਪਰ ਤੂੰ ਕੁਝ ਰਛੇ ਜੀ